ਵਾਸਨ ਜੀ ਪਹੁੰਚੇ ਵਾਸਤੇ ਸਾਰੇ ਹੀ ਪ੍ਰਚਾਰਕਾਂ ਤੇ ਉਚਾਸ਼ੀ ਅੱਗੇ ਜੀ ਕਿਰਪਾ ਮੈਂ ਸਾਜੋ ਬੜੇ ਧਿਆਨ ਨਾਲ ਪੜੀ ਰਹਾ ਇਹਨਾਂ ਦੇ ਨਾਂ ਤੇ ਕੋਈ ਖਬਰ ਆਉਂਦੀ ਹੈ ਬਾਜੇ ਵੇਲੇ ਜਦੋਂ ਵੀ ਆਵੇ ਸੰਤ ਦਰਬਾਰ ਅਨੁਸਾਰਾਂ ਫਲੰਤ ਨਜ਼ਰ ਸਤਿ ਸਾਕ ਸਾਧ ਸਤਿਗੁਰੂ ਦੀ ਸਾਜੀ ਨਵਾਜੀ ਆਪ ਸੱਜਣਾ ਨੇ ਵਿਦਵਾਨਾਂ ਦੇ ਵਿਚਾਰ ਸੁਣਨੇ ਨੇ ਤੇ ਗ੍ਰੰਥਾਕਾਰ ਜੀ ਲਿਖਦੇ ਨੇ ਤਨਕੀ ਕੀ 나ੜੀ 나ੜਕਾ ਮਨ ਕੀ 나ੜੀ ਬਹਿਣ ਇੱਕ ਇੱਕ ਅੱਖਰ ਦਾ ਸਾਬ ਤੁਸੀਂ ਆਪ ਸੱਜਣ ਜਾਣਦੇਗੇ ਜੇ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਕੱਤਰਤਾ ਹੋਏ ਆ ਇਹ ਤੇ ਜ਼ਰੂਰੀ ਆ ਜਿੰਨੀ ਸੰਗਤ ਭੈਣੀ ਸਾਹਿਬ ਆਈ ਆ ਨਾ ਉਹ ਘਰਾਂ ਵਿੱਚ ਦੇਰਿਆ ਵਜ ਤੇ ਆਏ ਅਸੀਂ ਸੌਣ ਨਹੀਂ ਗਏ ਇੱਥੋਂ ਕੋਈ ਲਾਭ ਖੱਟਣ ਵਾਸਤੇ ਆਇਆ ਉਹ ਕਈ ਮੈਂ ਪੜਣਾ ਵੇਖਿਆ ਸ਼ਰਦਾ ਬੜੀਆਂ ਸਵੇਰ ਦੀਆਂ ਹੀ ਆਈਆਂ ਨੇ ਪਰ ਆਣ ਕੇ ਸੁੱਤੀਆਂ ਨੇ ਤੇ ਦੱਸਣ ਗਿਆ ਕੀ ਕੀ ਸੁਣਿਆ ਵੇ ਇੱਥੇ ਕੋਈ ਜਾ ਕੇ ਲੈਣਾ ਹੈ ਤੇ ਸਤਿਗੁਰੂ ਦਾ ਜਸ ਸੁਣਨਾ ਹੈ ਜਿਹੜੇ ਵੀ ਸੱਜਣਾ ਦੀਆਂ ਤੁਸੀਂ ਕਥਾ ਸੁਣੀਆਂ ਜਾਂ ਪ੍ਰਲਾਦ ਦੀਆਂ ਜਾਂ ਉਹ ਪਿੱਛੇ ਵੀ ਸੁਣੀਆਂ ਹੈ ਉਹ ਆਪਾਂ ਵੇਖਣਾ ਵੀ ਉੱਚੇ ਕਾਦੇ ਨਾਲ ਹੋਏ ਨੇ ਕਿਹੜੀ ਸਭ ਤੋਂ ਵੱਡੀ ਚੀਜ਼ ਆ ਰਾਜਾ ਜਨਕ ਜਿਹੜਾ ਉਹਦੀਆਂ ਫੌਜਾਂ ਨਹੀਂ ਸੀ ਜ਼ਿਆਦੀਆਂ ਉਹਦੇ ਕੋਲ ਮਾਇਆ ਨਹੀਂ ਸੀ ਬਹੁਤੀ ਉਹਦਾ ਰਾਜ ਨਹੀਂ ਸੀ ਦੁਨੀਆਂ ਨਾਲ ਵੱਡਾ ਸਿਰਫ ਇਸ ਕਰਕੇ ਸੀਗੇ ਉਹਨੂੰ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਿਉਂ ਆਖਿਆ ਉਹਦਾ ਪ੍ਰਭੂ ਦੇ ਸਿਮਰਨ ਨਾਲ ਮਨ ਜੁੜਿਆ ਸੀ ਗੁਰਵਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਗੱਲ ਨੂੰ ਤੋਲ ਕੇ ਲਿਖਿਆ ਜੋ ਸੁਖਮਨੀ ਸਾਹਿਬ ਲਿਖੀ ਆ ਉਹ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਮੁਦਰੇ ਮੂੱਚਾ ਪ੍ਰਭ ਕੇ ਸਿਨ ਤ੍ਰਿਸ਼ਨਾ 부ਝੇ ਪ੍ਰਭ ਕੇ ਸਿਨ ਸਭ ਕੋਈ ਸੂਝੇ ਪ੍ਰਭ ਕੇ ਸਿਮਨ ਨਹੀਂ ਜਮ ਤਰਾਸਾ ਪ੍ਰਭ ਕੇ ਸਿਮਨ ਪੂਰਨ ਆਸਾ ਪ੍ਰਭ ਕੇ ਸਿਨ ਮਨ ਮਲ ਜਾਏ ਅਮਰਤ ਨ ਮਾ ਸਮਾਏ ਪ੍ਰਭ ਜੀ ਬਸੇ ਸਾਧਗੀ ਰਸਨਾ ਨਾਨਕ ਜਨਕਾ ਦਾਸ ਫਿਰ ਇਹਦ ਨੇ ਸਖਦੇਵ ਵੱਡਾ ਨਹੀਂ ਹੋ ਸਕਿਆ ਕਿਉਂ ਨਹੀਂ ਹੋਇਆ ਜੜਾਵਾਂ ਧਰਤੀ ਨੂੰ ਲੱਗੀਆਂ ਜਾਨਵਰਾਂ ਦੇ ਆਲ ਨੇ ਪਾਲਾ ਪਰ ਫਿਰ ਇਥੋਂ ਤੱਕ ਵੀ ਹੋਈ ਹੈ ਕਿ 12 ਸਾਲ ਸਿਰ 'ਚ ਰਾਜੇ ਜਨਕ ਦੇ ਲੰਗਰ ਜਾ ਕੇ ਝੂਠ ਵੀ ਸਿਰ 'ਚ ਪਈ ਆ ਮੇਰਾ ਆਪਣਾ ਖਿਆਲ ਨਹੀਂ ਗੁਰੂ ਜੀ ਗਰਬਾਣੀ ਕਹਿੰਦੇ ਨੇ ਬਰਮ ਕਮਲਪੁੱਤ ਮੀਨ ਵਿਆਸਾ ਤਬ ਤਾਪਨ ਪੂਜ ਕਰਾਵੇਗੋ ਜੋ ਜੋ ਭਗਤ ਹੋਇਸੋ ਪੂਜੋ ਪਰਮਨ ਪਰਮ ਚਕਾਵੇਗੋ ਜਾਤ ਜਾਤ ਦੇਖ ਮਤ ਸੰਭੋ ਸੁਖ ਜਨਕ ਪਗੀ ਲਗ ਧਾਵੇਗੋ ਆ ਝੂਠਣ ਝੂਠ ਪਈ ਸਿਰ ਉੱਪਰ ਖਨ ਮਰੂਆ ਤਿਲ ਨਾ ਸੋ ਗੱਲ ਕੇ ਕੋ ਧੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਮਹਾਰਾ ਜੀ ਜਿਨ੍ਹਾਂ ਨੇ ਕੋਈ ਝੂਠ ਨਹੀਂ ਸਿਰ 'ਚ ਪਾਈ ਕਿਸੇ ਨੂੰ ਇਹਨਾਂ ਨੇ ਇਹ ਨਹੀਂ ਵੀ ਸਿਰ ਲਾ ਕੇ ਸਿੱਖ ਬਣਾਏ ਨੇ ਉਹ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਸੀ ਉਹ ਕਾਰ ਉਹਨਾਂ ਆਪਣਾ ਬਚਨ ਕੀਤਾ ਮੈਂ ਬਹੁਤਾ ਪਿੱਛੇ ਨਹੀਂ ਹੁਣ ਜਾਣਾ ਕਿ ਵਕਤ ਤੇ ਮੈਂ ਥੋੜੀ ਥੋੜੀ ਗੱਲ ਕਰਨੀ ਆ ਕਿ ਫਿਰ ਕਿਤੇ ਦੱਸਾਂਗਾ ਵੀ ਸਿਰ ਕਿਉਂ ਲਾਉਣੇ ਪਏ ਗੁਰੂ ਗੋਬਿੰਦ ਸਿੰਘ ਨੇ ਤੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਦਾ ਵੀ ਉਹ ਕਾਰਨ ਸੀ ਕਿ ਤ੍ਰੇਤੇਜ ਯੁਗ ਤੋਂ ਆਰਾਮ ਚੰਦਰ ਦੇ ਵੇਲੇ ਬਚਨ ਹੋਇਆ ਸੀ ਸਤਗੁਰੂ ਆਰਾਮ ਸਿੰਘ ਨੇ ਉਹ ਗੱਲਾਂ ਕਰਕੇ ਵਿਖਾਈਆਂ ਤੁਸੀਂ ਪ੍ਰਿਲਾਦ ਦੀ ਕਥਾ ਸੁਣੀ ਆਂ ਵੀ ਅੱਗ ਨਾ ਸਾੜ ਸਕੀ ਸਤਿਗੁਰੂ ਰਾਮ ਸੇ ਸੱਚੇ ਪਾਤਸ਼ਾਹ ਨੇ ਸ੍ਰੀ ਗ੍ਰੰਥ ਸਾਹਿਬ ਅੱਗੇ ਵਿੱਚ ਰੱਖਿਆ ਸਤਿਗੁਰ ਪ੍ਰਤਾਪ ਸਿੰਘ ਦਾ ਭਾਸ਼ਣ ਸੁਣ ਲਿਓ ਅੱਗੇ ਵਿੱਚ ਰੱਖ ਕੇ ਲਾਹੌਰ ਕਬਰ ਨੌ ਨਿਹਾਲ ਸਿੰਘ ਦੀ ਫੌਜ ਵਿੱਚ ਜਾ ਕੇ ਜਦੋਂ ਰੱਖਿਆ ਅੱਗ ਦੀ ਜੁਰਤ ਨਹੀਂ ਪਈ ਸਾੜ ਸਕੀ ਸਾਰੀ ਫੌਜ ਇਕੱਠੀ ਹੋਈ ਰੌਲਾ ਪਿਆ ਜੀ ਇਹ ਤੇ ਬੀੜ ਲੱਭਣੀ ਨਹੀਂ ਵੀ ਹਰਿਸਨ ਨਲਵੇ ਨੇ ਬੜੀ ਸਾਹਮ ਕੇ ਰੱਖੀ ਸੀ ਸੱਚੇ ਪਾਤਸ਼ਾਹ ਨੇ ਮੈਂ ਵੇਖਣ ਲੱਗਾ ਬਹੁਤੀ ਪੁਰਾਣੀ ਤੇ ਨਹੀਂ ਹੋ ਗਈ ਅੱਖਰ ਚ ਠੀਕ ਦੇ ਕੱਡੀ ਵਾਰ ਚਮਕੀ ਫਿਰ ਆ ਆ ਪੰਜ ਧੂਣੀਆਂ ਲਾ ਕੇ ਬੈਠੇ ਨੇ ਫਿਰ ਇੱਥੇ ਗੱਲ ਨਹੀਂ ਜਦੋਂ ਹਰਦਵਾਰ ਗਏ ਨੇ ਸਹਬੋ ਜੱਟੀ ਤੇ ਬੱਚਾ ਲਾਲ ਸਿੰਘ ਗੋਦ ਚ ਬਿਠਾ ਕੇ ਆ ਕੇ ਜਮਾਇਆ ਆਏ ਦੁਨੀਆਂ ਦੇ ਲੋਕ ਬੜਾ ਕੁਝ ਕਹਿੰਦੇ ਨੇ ਵੀ ਨਾਮ ਤਾਰੀ ਕਿੱਥੇ ਇੰਨਾ ਕੁ ਪੰਥ ਕਿੱਥੋਂ ਤੁਰ ਪਿਆ ਉਹਨਾਂ ਨੇ ਅੱਗੇ ਬਿਠਾ ਫੜ ਕੇ ਲਾ ਕੇ 7 ਲੱਖ ਨਾਮ ਇਕੱਠਾ ਕੀਤਾ ਹੈ ਮੈਂ ਜਿਹੜਾ ਆਪ ਜੀ ਦੇ ਸਾਹਮਣੇ ਨਿਕਾਜਾ ਪ੍ਰਸੰਗ ਸ਼ੁਰੂ ਕਰਨ ਲੱਗਾ ਹੈ ਕਿ ਸਤਿਗੁਰੂ ਸੱਤੇਪਾਤ ਸ਼ਾ ਮੈਂ ਜਿੰਨਾ ਸੰਤਾਨ ਨਿਰਮਲ ਬਾਬਾ ਆਤਮਾ ਦਾਸ ਜੀ ਤੋਂ ਪੜਿਆ ਸਾਂ ਉਹਨਾਂ ਦਾ ਸੀ ਵੱਡਾ ਨਰਮਲ ਦਾਸ ਉਸ ਵੇਲੇ ਹਰਦਵਾਰ ਸਤਗੁਰੂ ਆਰਮ ਸਿੰਘ ਦਾ ਫੌਜ ਵਿੱਚ ਨੌਕਰ ਸੀ ਤੇ ਉਹ ਸਿਪਾਈ ਸੀ ਤੇ ਸਤਗੁਰੂ ਨੂੰ ਉਹਦਾ ਯਾਰ ਹੀ ਸਮਝਦਾ ਸੀ ਤੇ ਜਦੋਂ ਸੱਚੇ ਪਾਤਸ਼ਾਹ ਨੂੰ ਵੇਖਿਆ ਨਾ ਅੱਗ ਜਵਾਈ ਨੂੰ ਬਿਠਾਇਆ ਤੇ ਬੱਚਾ ਤੇ ਦੁਨੀਆ ਦੇ ਲੋਕ ਇਕੱਠੇ ਹੋਏ ਜੀ ਐਡਾ ਨਿਰਦੋਸ਼ ਬੱਚਾ ਨਾ ਮਾਰ ਦਿਓ ਸੱਚੇ ਪਾਤਸ਼ਾਹ ਦੇ ਤੂੰ ਮੇਰੇ ਨਾਲ ਫੌਜ ਵੀ ਰਿਆਂ ਸਾਰਾ ਕੋਈ ਵੇਖਿਆ ਜੇ ਤੇਰਾ ਮਨ ਨਹੀਂ ਖਲੋਤਾ ਪਿੱਛੇ ਹਟ ਜਾ ਜਦੋਂ ਫਿਰ ਬੱਚਾ ਜਿੰਦਾ ਤੇ ਮਾਈ ਨੂੰ ਬਾਹਰ ਕੱਢਿਆ ਤੇ ਉਹਨੇ ਦੋਖਾਂ ਨੂੰ ਦੱਸਿਆ ਵੀ ਮੈਂ ਤਾਂ ਐ ਬੈਠੀ ਦੀ ਨਾ ਠੰਡੇ ਪਾਣੀ 'ਚ ਬੈਠੀ ਸਾਂ ਤੇ ਫਿਰ ਵਰਾਗੀ ਹੋ ਕੇ ਚਰਨਾ ਦੇ ਡੇਗਾ ਉਹ ਨਰਮਲਦਾਸ ਉਹ ਫਿਰ ਇਹ ਰਾਜਾ ਜੰਗ বাহাদুর ਜਿਹੜਾ ਨਾ ਨੇਪਾਲ ਦੀ ਧਰਤੀ 'ਚ ਇਧਰ ਚਲਾ ਗਿਆ ਸੀ ਤੇ ਫਿਰ ਰਾਣੀ ਜਿੰਦਕੁਰਾ ਜਿਹੜੀਆਂ ਤਿੰਨ ਪੜਾਓ ਨਾਲ ਲੈ ਕੇ ਗਿਆ ਸੀ ਰਾਜੇ ਜੰਗ বাহাদুর ਕੋਲ ਖੰਡਵਾ ਤੇ ਰਸਤੇ ਨੂੰ ਨਾਲ ਮਰ ਗਿਆ ਸੀ ਉਹਨਾਂ ਦਾ ਜਿਹੜਾ ਸਿਨਾ ਇਹ ਪੋਤਰਾ ਪਰੋਤਰਾ ਸੀ ਜਿੰਨਾਂ ਕੋਲ ਮੈਂ ਪਹਿਲੋਂ ਪੰਜ ਕ੍ਰਿਸ਼ਤੀ ਪੜ੍ਹੀ ਸੀ ਤੇ ਉਹ ਕਥਾ ਕਰਦੇ ਹੁੰਦੇ ਸਾਲਾਂ ਤੇ ਸਤਗੁਰ ਆਮ ਸਿੰਘ ਦਾ ਉਹਨਾ ਲੇਖ ਬੜਾ ਲਿਖਿਆ ਸੀ ਮੈਂ ਉਹਨਾਂ ਦੀ ਬੜੀ ਕਥਾ ਸੁਣਦਾ ਕਾਫੀ ਕਥਾ ਮੈਨੂੰ ਯਾਦ ਨੇ ਅੱਜ ਉਹਨਾਂ ਦੇ ਪਰਥਾ ਇੱਕ ਗੱਲ ਛੋਟੀ ਸ਼ੁਰੂ ਕਰਨ ਲੱਗਾ ਜਿਤਨਾ ਉਹਨਾਂ ਕਥਾ ਕੀਤੀ ਸੀ ਤੇ ਉਹ ਜਿਹੜਾ ਸੀ ਨਿਰਮਲ ਦਾਸ ਉਹ ਜਿਹਦਾ ਚਰਨਾ ਦੇ ਡਿੱਗਿਆ ਤੇ ਉਹਨੇ ਤੂੰ ਤੇ ਯਾਰ ਸਮਝਦਾ ਹਾਂ ਆਂਦੇ ਨੇ ਅੱਜ ਮੈਂ ਸੱਚੇ ਬਾਦਸ਼ਾਹ ਤੁਹਾਡਾ ਹੋਰ ਰੰਗ 'ਚ ਦਰਸ਼ਨ ਕੀਤਾ ਉਦੋਂ ਯਾਰ ਸਮਝ ਕੇ ਕੀਤਾ ਸੀ ਇਥੋਂ ਦਾ ਪ੍ਰਸੰਗ ਸ਼ੁਰੂ ਕਰਨਾ ਫਿਰ ਇੱਕ ਰੰਗ ਅੱਜ ਕੇ ਕੋ ਧੰਨ ਸ੍ਰੀ ਸਤਗੁਰ ਆਮ ਸਿੰਘ ਜੀ ਮਾਰਾ ਜਿੰਨੇ ਭੁੰਡਰ ਭੈਣੀ ਨੂੰ ਭਾਗ ਲਾ ਕੇ ਭੈਣੀ ਸਹਿ ਬਣਾਇਆ ਤੇ ਮਸਤਾਨਾ ਹੋ ਗਏ ਧਰਤੀ ਦੇ ਲੇਟਿਆ ਫਿਰ ਨੇਪਾਲ ਦੀ ਧਰਤੀ ਜੀ ਪਹੁੰਚਦਾ ਰ ਫਿਰ ਆ ਨਹੀਂ ਸਕਿਆ ਗੁਰੂ ਰਾਮ ਸਿੰਘ ਆਖਿਆ ਹੁਣ ਤੈਨੂੰ ਗੁਰਮਤਰ ਦਵਾ ਉੱਥੇ ਫਿਰ ਉਹਨੂੰ ਮੰਤਰ ਦਿੱਤਾ ਹਰਦਵਾਰ ਤੇ ਫਿਰ ਇੱਥੋਂ ਨਸਿਆ ਤੇ ਰੰਗ ਚਾੜ ਤੱਕ ਆਇਆ ਰੰਗਣ ਜੀ ਇਥੇ ਪਾਈਏ ਨਾਮ ਜੀਠ ਰੰਗਣ ਵਾਲਾ ਸਹਿਬ ਜੇ ਰੰਗੇ ਫਿਰ ਐਸੇ ਰੰਗਣਾ ਡੀਠ ਤੇ ਚਰਨਾਂ ਦੇ ਡਿੱਗਿਆ ਤੇ ਕੀ ਕਹਿੰਦਾ ਵੀ ਓ ਬਣ ਗਿਆ دیਵਾਨਾ ਚਰਨਾਂ ਦਾ ਜਨ ਦਰਸ਼ਨ ਕੀਤਾ ਇੱਕ ਵਾਰੀ ਯਾਤਵੰਨਾ ਚਰਨਾਂ ਲਾਜ ਨਜ਼ਰ ਕੇ ਮੇਂ ਕੀਤਾ ਇੱਕ ਵਾਰੀ ਕਰਦਿਆ ਦੁਨੀਆਦਾਰੀ ਕੀ ਕਾਰ ਸੇ ਬਿਜਾਲਾ ਕਰਦਿਆ ਦਿਆ ਮਸਤਾਨਾ ਕਰਦਿਆ ਸੰਗੋ ਤੇਰੇ ਪ੍ਰੇਮ ਨੇ ਦਿਵਾਲਾ ਕਰਦਿਆ ਯੋ ਆਮਦਾ ਮਿਸ਼ਕ ਨੇ ਉਸ ਕਾ ਜਲਵਾ ਦਿਖਾ ਦਿਆ ਫਿਰਕੇ ਵਾਸ਼ੇ ਨੇ ਵਈ ਕੋਸ਼ਕੂਜ ਬਜਾ ਦਿਆ ਇਸੇ ਦੇਖਣਾ ਮਹੌਲ ਤਾਂ ਉਸ ਕੋ ਨਾ ਮੂ ਨਿਸ਼ਾਨ ਕੀ ਹਰ ਯਰ ਯਰ ਮੇਸ਼ਕ ਨੇ ਉਸ ਕਾ ਜਲਵਾ ਦਿਖਾ ਦਿਆ ਇਤੋਂ ਬਰਸਿਆ ਚਲਾ ਗਿਆ ਲਪਾਲ ਦੀ ਤਰਤੀ ਵਿੱਚ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਉਸ ਬਚਨ ਕੀਤੇ ਇਕਰਾਰ ਜੋ ਗੁਰੂ ਗੋਬ ਸਿੰਘ ਦਸਵੇਂ ਜਾਮੇ ਚ ਕਰਕੇ ਗਿਆ ਸੀ ਜਾਮੇ ਧਾਰੇ ਦਸ ਗੁਰੂ ਨਫਸਤ ਕਲਾਸ ਅਧਾਰ ਗੁਪਤ ਯਾਰਵਾ ਖੇਲ ਸੀ ਕੋਈ ਪਾਵੇ ਪਾਰ ਜਾਮਾ ਪਹਿਰੇ 11ਵਾਂ ਬਾਜਾਪੁਰਕੇ ਮਾਏ ਸੰਤ ਮਲੇ ਕਰੋੜ ਜੇ ਦਰਸ਼ ਦਿਖਾਏ ਤਾਏ ਜਾਮਾ ਪਹਿਰੇ 12ਵਾਂ ਪਰਿਦਾਸ ਕੇ ਬਸ ਸੰਗਤਾਂ ਨਾਲ ਤਪਜਨ ਕੋੜ ਸੰਸ ਦਵਾਦਾਪੁਰ ਕੇ ਆਸੇ ਸਮਨ ਕੇ ਸਰਮਾਰ ਸੰਗਤਾਂ ਨਾਲ ਤੀ ਆਗੇ ਆਦਾਨ ਔਰ ਬਰਗਟ 12ਵਾਂ ਬਾਪ ਦਰਸਾਵੇ ਨਰ ਨਾਰੀ ਕੋ ਨਾਮ ਚ ਪਾਵੇ ਇਹ ਦਿਨ ਮਿਸ਼ਨ ਵੀ ਮੈਂ ਸਾਜੁ ਕੋ ਆਂਦੇ ਨੇ ਥਿਤ ਖੈਤ ਮੀ ਸੁਰਗ ਰਵਾਰਾ ਦੀ ਰੋਤੋਏ ਇੱਕ ਦੇ ਖਸ਼ਣ ਮੀ ਰੋਤੋਏ ਫਤਕੈ ਤੁਮੀ ਸਵੀਰਵਾਰ ਦਾ ਦਿਨ ਹੋਏਗਾ ਫਤਕੈ ਤੁਮੀ ਸੁਰਗੁਰਵਾਰਾ ਪਸਮੰਤਰ ਨਗਰ ਸਤ ਲੁੱਧ ਕਿਨਾਰਾ ਉਹ ਕਾਲਯੁਗ ਤੇ ਸਾਜੁਗ ਥਾਨੋ ਤਵੀ 12 ਵਾ ਬੱਬ ਚਾਨੋ ਤੇ ਫਿਰੰਦ ਨੇ ਯਾਹੀ ਤਲ ਤੇ ਪ੍ਰਗਟ ਹੋਏ ਤਾਹੀ ਕੋਲ ਕੋ ਨਾਮ ਪੁੰਨ ਦਵਾਦ ਗ੍ਰੰਡ ਕੋ ਮੇਰੀ ਹੈ ਪ੍ਰਣਾਮ ਫਿਰ ਕਹਿੰਦੇ ਨੇ ਡਰਨ ਦੀ ਲੋੜ ਨਹੀਂ ਭਾਈ ਲਾਲ ਸਿੰਘ ਪੜਥਖਾਰ ਸਾਖੇਤੀ ਮੇਰੀ ਓਹ ਆਂ ਸੰਭਾਲ ਕਰੂ ਮੈਂ ਫਿਰ ਤੇ ਸਵੇਰੀ ਕਦੇ-ਕਦੇ ਪੁਰਾਣੇ ਸਾਧੂ ਬੋਲਦੇ ਹੁੰਦੇ ਸਨ ਜਿਸ ਧਰਤੀ ਤੇ ਤੁਸੀਂ ਬੈਠੇ ਜੇ ਉਹ ਮੇਰੇ ਸਤਨ ਅੰਜਨ ਸਾਹਿਬ ਦੇ ਪਸੂ ਵੀ ਬਖਸ਼ੇ ਦੇ ਬੰਦਿਆਂ ਦੀ ਤੇ ਗੱਲ ਹੀ ਕਿਦਾਂ ਰਹਿ ਗਈ ਇੱਕ ਨੇ ਤੇ ਬੰਮੀ ਤੇ ਨਹਾਉਣਗੇ ਤੋਂ ਸਿਰ ਮੰਨਿਆ ਤੇ ਨਹਾਉਣ ਡਿਆ ਤੇ ਪਰਨਾ ਬੱਧਾ ਤੇਲ ਤੇ ਘੜੀ ਮੁਣੀ ਆ ਕੇ ਤਨ ਸਤਗੁਰ ਪ੍ਰਤਾਪ ਸਿੰਘ ਤਨ ਸਤਗੁਰ ਪ੍ਰਤਾਪ ਸਿੰਘ ਉਸਤਾਦ ਮੇਰੇ ਖਲਾਸਾ ਜਾ ਸੁਆਹ ਅੰਜਨ ਸੁਣਨ ਦਾ ਬੜੇ ਸਾਰੇ ਇਕੱਠੇ ਦਵਾਲ ਲਾਉਂਦੇ ਰਿਹਾ ਆਖਣ ਲਗਾ ਬਾਬਾ ਉਹ ਤੂੰ ਤੇ ਕਿਸ਼ਾਰਾ ਵੀ ਨਹੀਂ ਪਾਇਆ ਤੇ ਸਿਰਮੂ ਤੇਰਾ ਹੈ ਹੀ ਨਹੀਂ ਤੇ ਮੈਂ ਬਖਸ਼ਿਸ਼ ਕਲੀਮੁਰੀ ਧਰ ਸਤਗੁਰ ਪ੍ਰਤਾਪ ਸਿਆਣਾ ਉਹ ਆਂਦਾ ਆਂਗਾ ਕਿ ਸਿਰਮੂ ਦਾ ਕਰਨਾ ਸਾਡੇ ਤੇ ਪਸੂ ਵੀ ਬਖਸ਼ੇ ਅਸੀਂ ਉਹ ਧਰਤੀ 'ਚ ਬੈਠੇ ਆਂ ਜਿੱਥੇ ਸਤਗੁਰ ਇੰਨੇ ਹੋਏ ਨੇ ਗੁਰੂ ਰਾਮ ਸਿੰਘ ਦੇ ਚਰਨ ਪੈਰ ਇਸ ਧਰਤੀ ਦੇ ਜਿੱਥੇ ਆ ਜੇ ਬਖਸ਼ੀ ਧਰਤੀ ਤੇ ਬੈਠੇ ਸਜਣੋ ਇਸ ਧਰਤੀ ਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜੋ ਕਹਿ ਕੇ ਗਿਆ ਸਰ ਹੁਕਮ ਕਰਕੇ ਗਿਆ ਮੈਂ 12ਵੇਂ ਜਾਮੇ ਨੰਦ ਸਿੰਘ ਸੰਤੋਏ ਸੁਣਾਉਂ ਤੇਰੇ ਮਰਕਾ ਭਰਨ ਮਟਾਉ 1.0 ਹੋਏ ਵਤਾਰਾ ਹੋਵੇ ਨਹੀਂ ਸਾਰਾ ਜੋ ਤੇ ਮਾਰੇ ਤੇ ਤਨ ਰਹਿ ਸੁਣ ਕੇ ਅਨੰਤ ਸੰਤ ਤਬਗਾਂ 12ਵੇਂ ਗੁਰ ਕੇ ਲਖਣ ਕਿਓ ਸ੍ਰੀ ਮੁਕਤਸਿ ਸਵੇਸੇ ਜਾ ਰਹੇ 12 ਸੇ 78 ਜਬ ਸੰਤ ਖਾਲਸਾ ਜਿੰਨ ਪਟਾਵੇ ਜਪ ਜਾਵੇ ਹਰਦੇ ਕੇ ਮਾਈ ਵਿਅਸਕ ਧਰਮੂ ਰੂਪ ਹੋ ਜਾਇ ਗਵਨ ਰਚ ਭਾਰੀ ਅੱਸੀ ਸੀਸਲੇ ਜੇ ਸਵਾਰੀ 12 ਸੇ 88 ਜਬ ਆਵੇ ਸਤਗੁਰ ਦੇਸ਼ ਛੋੜ ਪ੍ਰਦੇਸ਼ ਸੁਦਾਵੇ ਸਭ ਸਿੱਖਣ ਕੋ ਦੇਖ ਵਿਚਾਰਾ ਧਰਮ ਕਾ ਸਗਲ ਪਸਾਰਾ RAM ਸਰੋਵਰ ਕਰਿ ਵਰਤਿਤ ਪੁਨ ਕਰੇ ਪਿਆਨਾ ਬਾਡੀ ਸਤ ਕਈਆ ਗੁਰ ਜੋ ਇਹ ਅਨੰਤ ਕਲਾਸੋ ਪ੍ਰਗਟ ਇਹਨਾਂ ਕਲਾ ਦਾ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣਵੇਂ ਜਾਮੇ ਜਦੋਂ ਆਵਾਂਗਾ ਨਾ ਤੇ ਸੰਤ ਖਾਲਸਾ ਇਹ ਖੇਤੀ ਮੇਰੀ ਆ ਨੰਸਿਆ ਤੈਨੂੰ ਕੀ ਫਿਕਰ ਆ ਤੂੰ ਆਖਿਆ ਮੈਨੂੰ ਸੰਭਾਲੇਗਾ ਕੌਣ ਇੱਕ ਨਾ ਕਹਿ ਲੋ ਫਿਰ ਅੱਗੇ ਚੱਲ ਜਾ ਖੇਤੀ ਮੇਰੀ ਆ अनुसमाल हंगा खेत बिंदेरी ਜੀਵਨ ਲਿਆ ਵਤਾਰਿਆ ਮਾਲਵੇ ਦਾ ਦੇ ਲੁਧਿਆਣਾ ਪਿੰਡ ਪਾਣੀ ਸਾਹਿਬ ਬਈ ਦੀ ਕੋਲ ਜਿੰਨਾ ਦਿੱਤੀਆਂ ਤਾਰਿਆ ਧੰਨ ਪਿਤਾ ਜੱਸਾ ਸਿੰਘ ਸਦਾ ਕੋਰ ਵਿਦਾ ਵਿਦਾ ਜਸ ਗਾਉਂਦਾ ਅਜ ਕੁੱਲ ਸੰਸਾਰ ਉਹ ਦਸਵੇਂ ਗੁਰੂ ਤੇ ਹਿੰਦੂਆਂ ਤੋਂ ਸਿੰਘ ਕੀਤੇ ਇਹ ਲਗ ਨਾਮ ਰੂਪੀ ਖਾਲਸਾ ਸਜਾ ਲਿਆ ਗੋਚ ਚਤੀ ਮਾਲਾ ਕੱਪੜੇ ਸਪੈਸ ਜਿੱਟੇ ਤੇ ਕਾਲ ਯੋਗ ਵਿੱਚ ਸਤਜੋਗ ਵਰਤਾਰਿਆ ਸੁਕੇ ਬਾਗ ਤਾਂ ਆਇ ਹਰਾ ਪਰਾ ਕੀਤਾ ਤੇ ਦੇਸ਼ ਪ੍ਰਦੇਸ਼ ਵਿੱਚ ਖੜੀ ਗਲਜਾ ਇਹ ਫੁੱਲ ਸਭ ਟੇਕ ਉੱਠੇ आ गया पहाड़ा ਗਰਬਹਾਰ ਜਿੰਨੂੰ ਭੁੰਡਰ ਭਾਲੀ ਪੇ ਪੈਣੀ ਕਹਿੰਦੇ ਸਨਾਹ ਭਾਲੀ ਸਾਹਿਬ ਨੇ ਕਿਹਾ ਕਿਉਂਕਿ ਸਤਿਗੁਰੂ ਨੂੰ ਬੇੜੀ ਦੀ ਤਸਵੀਰ ਵੀ ਦਿੱਤੇ ਆ ਸਤਿਗੁਰੂ ਨੂੰ ਸੂਰਜ ਦੀ ਵੀ ਤਸਵੀਰ ਦਿੱਤੀ ਗਈ ਆ ਸਾਹਿਬ ਕਹਿੰਦੇ ਨੇ ਪ੍ਰਗਟ ਆ ਸੂਰਨਿ ਹੰਦਿਆਰਾ ਅਗਿਆਨ ਮਟਾਇ ਗੋ ਰਤਨ ਪਾਲਾ ਸਤਿਗੁਰੂ ਗਿਆਨ ਰਤਨਤ ਪਾਰੇ ਤੇ ਕਰਮਲੇ ਸੁਖ ਪਾਈ ਜੇ ਵੱਡੇ ਕਰਮ ਹੁਣ ਤੇ ਸੁਖ ਪ੍ਰਾਪਤ ਹੋਣਾ ਦੀ ਸਾਰੀ ਦੁਨੀਆ ਨੂੰ ਨਹੀਂ ਹੋ ਸਕਦਾ ਐਟਮਾ ਨਾ ਕੇ ਸਾਇੰਸ ਦਾ ਗਿਆਨ ਰੋ ਰਿਹਾ ਮੂਮਨਾ ਨੂੰ ਵੇਖ ਕੇ ਮਾਨ ਰੋ ਰਿਹਾ ਸਿੱਖੀ ਰੋਂਦੀ ਬਾਲਮਾ ਸਿੱਖਾਂ ਦੇ ਫੈਸ਼ਨ ਵੇਖ ਕੇ ਉਹ ਭਗਤਾਂ ਨੂੰ ਤੱਕ ਕੇ ਭਗਤੀ ਭਗਵਾਨ ਰੋ ਰਿਹਾ ਸੱਚੇ ਭਖਾਰੀ ਬਣ ਗਏ ਝੂਠਿਆਂ ਦਾ ਰਾਜ ਸੱਚੇ ਦੇ ਮੂੰਹ ਨੂੰ ਜੰਦਰਾ ਤੇ ਝੂਠੇ ਦੀ ਅੱਜ ਆਵਾਜ਼ ਸਤਿਅ ਦੇ ਸਿਰ ਤੇ ਟੋਕਰੀ ਤੇ ਝੂਠੇ ਦੇ ਸਿਰ ਤੇ ਤਾਜ ਸੰਗੁਰ ਆਪਸੇ ਲੋਕਾਂ ਦਬਾਉਣ ਦਾ ਬੜਾ ਯਤਨ ਕੀਤਾ ਤੇ ਪ੍ਰਗਟ ਹੋਇਆ ਕਿਉਂਕਿ ਦੀਵੇ ਦਾ ਚਾਨਣਾ ਨਹੀਂ ਇੱਕ ਘਰ ਵਿੱਚ ਹੋਣਾ ਸੀ ਇੱਕ ਪਿੰਡ ਵਿੱਚ ਹੋਣਾ ਸੀ ਇੱਕ ਸ਼ਹਿਰ ਵਿੱਚ ਹੋਣਾ ਸੀ ਇਹ ਸੂਰਜ ਦਾ ਪ੍ਰਕਾਸ਼ ਹਰ ਜਗ੍ਹਾ ਤੇ ਫੈਲਣਾ ਸੀ ਫਿਰ ਸਾਹਿਬ ਕਹਿੰਦੇ ਨੇ ਸਤਿਗੁਰੂ ਇਹ ਬੋਥਾ ਬੜਾ ਕੇ ਬੇੜੀਆਂ ਸਾਰੇ ਜਿਹੜੇ ਲੋਕ ਪਛੜੇ ਸਨ ਕਈਆਂ ਸਾਲਾਂ ਸਮਿਆਂ ਤੋਂ ਆਪਣੀ ਬੇੜੀ ਤੇ ਚਾਰ ਕੇ ਪਾਰ ਕਰ ਦਿੱਤੇ ਸੱਜੂ ਗੀ ਸਭ ਦੇਵਤੇ ਬੈਠੇ ਨੇ ਲੋਕ ਪਰ ਕਿੱਡੀ ਆਸ ਨੂੰ ਨਿਸ ਮਿਟਿਆ ਹੇ ਯਾਰਾ ਸਤਿਗੁਰੂ ਰੋਇਆ ਤਾਂ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਪਰ ਸਾਹਿਬ ਕਹਿੰਦੇ ਨੇ ਬਦਲ ਵੀ ਆ ਤਨ ਤਨ ਪਿਤਾ ਤਨ ਤਨ ਕੋ ਤਨ ਤਰਸੋ ਜੰਨੀ ਜਰ ਗੁਰੂ ਜਣਿਆ ਮਾਏ ਤਨ ਤਨ ਗੁਰੂ ਜੇ ਨਾਮ ਰੱਬ ਆਪ ਤਰਿਆ ਜਿੰਨਾ ਡਿਠਾ ਤਿੰਨਾ ਲੈ ਛਡਾਇ ਸਤਿਗੁਰ ਮਿਲੋ ਦਇਆ ਕਰ ਜੇ ਨਾਨਕ ਧੋਵੇ ਜਿੱਥੇ ਜਾ ਕੇ ਬੇਵੇਂ ਬੱਦਲ ਬਰਸਦਾ ਨਾ ਸਤਿਗੁਰ ਇਤਨਾ ਬਰਸਦਾ ਤੇ ਗੁਰਪਰਮੇਸ਼ਰ ਏ ਕੋ ਜਾਣੋ ਜਿਨ੍ਹਾਂ ਨਹੀਂ ਜਾਣਿਆ ਪ੍ਰਾਪਤੀ ਨਹੀਂ ਕਰ ਸਕਦੇ ਮੇਰਾ ਆਪਣਾ ਨਹੀਂ ਖਿਆਲ ਗੁਰਬਾਣੀ ਦਾ ਖਿਆਲ ਗੁਰਪਰਮੇਸ਼ਰ ਏ ਕੋ ਜਾਣੋ ਗੁਰੂ ਜੀ ਤੇ 'ਚ ਕੋਈ ਫਰਕ ਨਹੀਂ ਆਗਾ ਆਪ ਨਰਾਇਣ ਕਲਾ ਤਾਰ ਜਗ ਮੇ ਤੇ ਪਰਮੇਸ਼ਰ ਕਰਕੇ ਰੂਪ ਕਰਕੇ ਕਿਉਂ ਕਾਲ ਮੂਰ ਜੂਨੀ ਸੇ ਜੂਨਾ ਤੋਂ ਰਤ ਆਉਂਦਾ ਆਣ ਕੇ ਧਰਤੀ ਨੂੰ ਭਾਗ ਲਾਉਂਦਾ ਅੱਜ ਸਰੇ ਆਣ ਕੇ ਸ੍ਰੀ ਭੈਣੀ ਸਾਹਿਬ ਬੈਠੇ ਨੇ ਇਹ ਰਾਮ ਸਰੋਵਰ ਜਿਹਨੂੰ ਛੱਪੜ ਲੋਕ ਕਹਿੰਦੇ 28 ਕਨਾਲ ਥੇ ਜ਼ਮੀਨ ਸੀ ਲੋਕ ਮੂਸਰ ਲਾਉਂਦੇ ਸਨ ਤੇ ਮੱਝਾਂ ਵਿੱਚਵਾੜਦੇ ਸਨ ਜਿਸਲੇ ਆਣ ਕੇ ਸੱਚੇ ਪਾਗਲ ਦੁਨੀਆ ਦੇ ਲੋਕੋ ਮੇਰਾ ਆਰਾਮ ਸਰੋਵਰ ਇੱਥੇ ਚਰਨ ਪਾਇਆ ਫਿਰ ਕਿ ਦੱਸਾਵਾਂਗੇ ਕਿ ਕਿਤਨਾ ਲਾਹੌਰ ਤੋਂ ਇਸੇ ਕੋੜੀ ਰਾਜੀ ਕੀਤੀ ਸੀ ਪਹਿਲਾਂ ਸਭ ਤੋਂ ਜਿਸਲੇ ਆਏ ਤੇ ਦੂਰ ਦੂਰ ਗੂੰਜੀਆਂ ਪਈਆਂ ਆਪਣੀ ਆਵਾਜ਼ ਤੇ ਜਦੋਂ ਆਵਾਜ਼ ਆਪਣੀ ਨਾ ਤੇ ਸਰਦਾਰ ਮੰਗਲ ਸਿੰਘ ਜੀ ਦਾ ਤੁਸੀਂ ਜ਼ਿਕਰ ਕਰਦੇ ਜੇ ਮੈਂ ਛੋਟਾ ਜਿਹਾ ਪ੍ਰਸੰਗ ਹੋਇ ਸ਼ੁਰੂ ਕਰਨ ਲੱਗਾ ਸਾਧ ਸੰਗਤ ਦੇ ਸਾਹਮਣੇ ਇਹ ਇੱਕ ਬੜਾ ਦੁਰਾਚਾਰੀ ਮਨੁੱਖ ਸੀ ਉੱਤੇ ਰੱਖੇ ਸਨ ਘੋੜੀਆਂ ਰੱਖੀਆਂ ਸਨ ਸ਼ਿਕਾਰ ਖੇਡਦਾ ਸੀ ਸ਼ਰਾਬ ਪੀਣੀ ਮਾਸ ਖਾਣੀ ਇਹੋ ਜੀ ਬੁੱਧੀ ਸੀ ਮਦ ਪੀਤੇ ਮਦ ਦੂਰ ਹੋਏ ਪੈ ਵਿੱਚ ਆਏ ਆਪਣਾ ਪਰਾਂ ਦਾ ਪਛਾਣ ਹੀ ਧੱਕੇ ਹਾਏ ਇਹੋ ਜੇ ਤੋਂ ਪਿੱਛੇ हट ਚੁੱਕੇ ਸਨ ਆਦ ਕੀ ਮੈਂ ਉਧਰ ਦੇ ਇਲਾਕੇ ਚ ਗਿਆ ਸਾਂ ਤੇ 35 ਸਰੀ ਉੱਠ ਕੇ ਖਲੋਤੇ ਦਵਾਨ 'ਚ ਇੱਕ ਬੜਾ ਗੁਰਮ ਪਿਆਰਾ ਸੀ ਤੋਂ ਨੇ ਕਿਰਪਾਨ ਪਾਈ ਸੀ ਤੇ ਮੈਂ ਬੜਾ ਖੁਸ਼ ਹੋ ਕੇ ਉਹਨੂੰ ਦਵਾਨ ਚ ਆਖਿਆ ਮੈਂ ਗੁਰਮ ਫਿਰ ਤੈਨੂੰ ਤੇ ਬੜੀ ਮौज ਬਣ ਗਈ ਐਜੀ ਕਿਵੇਂ ਮੈਂ ਮਨ ਭਜਨ ਤੇ ਕੁਰਬਾਨ ਹੀ ਬਥੇਰਾ ਕਰ ਲੈਂਦੀ ਹੁਣੀ ਆ ਤੂੰ ਨਾ ਤੂੰ ਨੋਟ ਪੈਂਦੀ ਕਰਦੀ ਐ ਨਾਲੇ ਜੀ ਇਹ ਕਰ ਨਹੀਂ ਸਕਦੀ ਐ ਇਹ ਨਹੀਂ ਕਰ ਸਕਦੀ ਮੈਂ ਫਿਰ ਪਾਈ ਕਾਦੇ ਲਈ ਮੈਂ ਕਿਹੜੀ ਚੀਜ਼ ਕਰ ਸਕਦੀ ਅੱਖਾਂ ਕਰ ਲੈਂਦੀਆਂ ਨਾ ਨੱਕ ਕਰ ਲੈਂਦਾ ਐ ਨਹੀਂ ਜੀ ਮੈਂ ਫਿਰ ਕੱਪੜੇ ਜਿਹੜੇ ਪਾਏ ਨੇ ਕਬੀਰ ਕਹਿੰਦਾ ਨਾਗੇ ਜਾਵਣ ਤੇ ਨਾਗੇ ਜਾਣਾ ਕੋਈ ਨਾ ਰਾਸੀ ਰਾਜਾ ਰਾਣਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੇ ਸੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਫੌਜੀ ਬੰਦਾ ਸੀ ਬੜਾ ਮੇਰੇ ਨਾਲ ਲੰਮਾ ਸੀ ਇਹ ਮੇਰੇ ਨਾਲ ਹੱਸ ਪੇ ਮੈਨੂੰ ਫਿਰ ਕੋਲ ਹੋ ਗਿਆ ਦੁਆ ਲਾ ਲਿਆ ਸੀ ਉੱਠ ਕੇ ਮੈਂ ਕਿਹਾ ਫਿਰ ਮੈਨੂੰ ਭਜਨ ਦਵਾ ਦੇ ਐਜੀ ਕਿਹਦੇ ਕੋਲੋਂ ਮੈਂ ਮੰਨਦਾ ਕਿੰਨੂ ਆਂਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਆ ਮੈਂ ਵੀ ਮੰਨਦਾ ਐ ਫਿਰ ਤੁਸੀਂ ਮੰਨਦੇ ਜੇ ਫਿਰ ਕੀ ਹੁ ਕਬਿਆ ਮੈਂ ਨਹੀਂ ਮੇਰੀ ਮਿਹਨਤ ਆ ਮੈਨੂੰ ਬੜੇ ਸਾਲ ਹੋ ਗਏ ਨੇ ਮੈਨੂੰ ਭਜਨ ਨਹੀਂ ਇਹ ਦਿੰਦਾ ਇਹਦੇ ਚ ਭਜਨਾਂ ਤੇ ਲੈ ਦਿਓ ਮੈਂ ਹੱਥ ਜੋੜਦਾ ਆਂਦੇ ਜੀ ਇਹ ਦੇ ਨਹੀਂ ਸਕਦਾ ਤੇ ਮੈਂ ਆ ਫਿਰ ਮੈਂ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਨਾਲ ਦੇ ਸਕਦਾ ਫਿਰ ਮੈਂ ਤੈਨੂੰ ਦੇ ਦਿੰਦਾ ਇਹ ਨਹੀਂ ਦੇ ਸਕਦਾ ਤੇ ਮੈਂ ਦਿੰਦਾ ਉਹ ਜਦੋਂ ਮੈਂ ਫੜਿਆ ਨਾ ਵੇ ਮੈਨੂੰ ਸੇਵਾ ਦਾ ਜਵਾਨ ਬੜਾ ਲੰਮਾ ਹੈ ਇਹ ਥਾਂ ਨੂੰ ਨੀਵਾ ਕਰ ਲਾ ਹੱਸ ਪਿਆ ਮਾਲਾ ਗੱਲ ਪਾਈ ਫਿਰ 35 ਹੋਰ ਉੱਠੇ ਸਾਰੇ ਕਿਰਪਾਣਾ ਵਾਲਿਆ ਸੱਜਣਾ ਨੇ ਭੰਜਨ ਪੁੱਛਿਆ ਆ ਪਖਾਨਕੋਲ ਤੇ 100 ਉੱਤੇ ਲੰਗੇ ਸਨ ਸੋ ਮੇਰੇ ਕਹਿਣ ਦਾ ਭਾ ਇਹ ਸਤਿਗੁਰੂ ਮਨੇ ਪ੍ਰਕਾਸ਼ ਪਾਇਆ ਪਰਮਨਾਸਿਆ ਮੰਤਰ ਦੀ ਗੁਰਕਾਨ ਸਾਨੂੰ ਵੀ ਕੋਈ ਬੁੱਧੀ ਨਹੀਂ ਸੀ ਮੈਂ ਅੱਗੇ ਕਈ ਵਾਰ ਅਰਜ਼ੀ ਕੀਤੀ ਸੀ ਕਿ ਮੈਂ ਪਹਿਲੀ ਉਮਰ ਵਿੱਚ 11 ਸਾਲ ਕੁਸ਼ਤੀ ਕੀਤੀ ਆ ਪਾਕਿਸਤਾਨ ਵਾਲੇ ਮੈਂ 20 ਸਾਲ 19 20 ਸਾਲ ਦਾ ਸੀ ਸਰਤਾਂ ਦੰਨ ਸੋਨਾ ਮੈਂ ਕਾਫੀ ਦੁਆਨ ਲਾਇਆ ਤੇ ਉਹ ਮੈਂ ਗੁੰਦਰੀਆਂ ਪਾਈਆਂ ਆਪਣੇ ਕੰਨਾਂ 'ਚ ਮੁਰਕੀਆਂ ਇਹ ਸਦਰੂ ਬਰਦਾਸ਼ਤ ਨੇ ਮੈਨੂੰ ਸਦਕੇ ਬਖਸ਼ੀ ਕੀਤੀ ਜੜਾਵਾਂ ਰੱਖੇ ਸਿਰ ਤੇ ਨਿਰਮਲੀਆਂ ਕਈ ਸਾਲ ਆਦੇ ਪੁੱਤਰ ਜੜਾਵਾਂ ਕਟਾ ਕੇ ਦਨ ਸਲਤਵਾਨ ਤੇ ਫਿਰ ਮੈਂ ਗਾਉਣਾ ਕੀ ਉਹ ਮੈਂ ਕਾਛੀ ਦਿੱਤੀਆਂ ਨਾ ਬੰਸਰੀਆਂ ਸੱਤੇ ਪਾਸ਼ਾ ਗੁਲਾਮਾਂ ਦੇ ਤੇਜਾ ਹੁਣ ਜਾ ਕੇ ਇਸ਼ਨਾਨ ਕਰਕੇ ਤੇ ਭਜਰ ਪੁੱਛ ਕੇ ਆ ਤੈਨੂੰ ਬੰਦਾ ਬਣਾਵਾ ਹਾਂ ਤੇ ਪਹਿਲਾਂ ਬੰਦਾ ਸਰਬ ਬੰਦਾ ਬਣਿਆ ਨਹੀਂ ਸਨ ਇਹ ਸਖਤ ਸਾਹਿਬ ਗੱਜਕੇ ਦਾ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਮੈਨੂੰ ਆਂਦੇ ਨੇ ਗਾਉਂਦਾ ਕੀ ਆ ਮੈਂ ਆ ਜੀ ਮੈਂ ਸੁਣਾ ਦਿੰਦਾ ਮੈਂ ਬਸਰੀਵ ਜਾਵਾਂ ਕਿ ਬਾਬੇ ਫਰੀਦ ਦੇ ਡੇਰੇ ਦੀ ਗੱਲ ਆ ਤੇ ਮੈਂ ਉਹਨਾਂ ਨੇ ਇੱਕ ਪੰਗਤੀ ਸਾਈ ਤੁਸੀਂ ਜਾਗੋ ਖੰਵੇਂ ਭੇੜਿਓ ਨਣੋ ਕੁੰਡਾ ਕਿੱਲਿਆ ਤੱਤੀ ਦਾ ਘੜਕਾਇਆ ਤੂੰ ਦੇ ਜੰਗ ਖੰਲੇ ਰੁੜਜੇ ਮਾਤਾ ਕੁੰਡਾ ਨਹੀਂ ਅੜੀਆਂ ਨਹੀਂ ਤੋਤਾ ਢੋਲ ਦਾ ਮੀਨੋ ਬਸ ਕਰ ਇੰਨਾ ਹੀ ਬੜਾ ਏ ਨਹੀਂ ਪੁੱਤ ਗਾਉਣਾ ਹਣ ਤੂੰ ਇਹ ਸੱਬਰੂ ਜਗਜੀਤ ਸਿੰਘ ਫਿਰ ਉਹ ਤੋਂ ਬਾਅਦ ਬਖਸ਼ਿਸ਼ ਕੀਤੀ ਜਾਂਦੇ ਮੈਨੂੰ ਮਵਾਜਾ ਵੀ ਨਹੀਂ ਸਮਝਾ ਲੈਂਦਾ ਸੋ ਸਹਿਣ ਦੇ ਪਾਂ ਮਲੁਖ ਗੁਰੂ ਮਲੁਖ ਦਾ ਜੀਵਨ ਬਦਲ ਦਿੰਦਾ ਜੀਵਨ ਮਨੇ ਪ੍ਰਕਾਸ਼ ਪਾਇਆ ਪਰਮਨਾਸਿਆ ਮੰਤਰ ਦੀਆ ਗੁਰਕਾਨ ਉਹ ਸਰਦਾਰ ਮੰਗਰ ਸਿੰਘ ਬਿਸ਼ਰਪੁਰੇ ਬੈਠਾ ਸੀ ਸਤਗੁਰ ਆਪਸੇ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਦੁਆਨ ਦਾਗਰੇ ਸੀ ਇੱਕ ਸਾਡੇ ਦਰਸ਼ਨ ਸਿੰਘ ਵਰਗਾ ਗਰੂ ਪਿਆਰਾ ਉੱਥੋਂ ਆ ਗਿਆ ਉਹਦਾ ਨੌਕਰ ਆਂਦਾ ਜਦੋਂ ਆ ਕੇ ਦਰਸ਼ਨ ਕੀਤਾ ਨਾ ਜਿਸ ਮਿਲਿਆ ਮਨ ਹੋਏ ਅਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਦਾ ਬਲ ਪਰਮ ਪਦ ਲਈਏ ਜਦੋਂ ਮਨ ਦੀਆਂ ਸਾਰੇ ਵਕਾਰ ਨਿਕਲ ਗਏ ਨਾ ਤੇ ਜਦੋਂ ਘੋੜਿਆਂ ਦੀ ਸੇਵਾ ਕਰਦੇ ਤੇ ਰਾਤ ਉੱਥੇ ਗੋਵੇਂ ਆ ਸਾਡਾ ਜੋਸ਼ ਨਾ ਕਾਲ ਚੁੰਗ ਲੈ ਕੇ ਰਾਤ ਨਾ ਇੱਕ ਦਿਨ ਨੌਣ ਰਿਆ ਤੇ ਟੂਟੀ ਚੱਲੀ ਜਾਂਦੇ ਪਾਣੀ ਪੀਜ ਤੇ ਗੋਵੇਂ ਜਾਂ ਫੇ ਮੈਂ ਕਿੱਥੇ ਕੱਪੜੇ ਆਹਦਾ ਜੀ ਬੜੀ ਦੂਰ ਚਲਾ ਗਿਆ ਉਹ ਬਿਰਤੀ ਹੋਰ ਹੋ ਜਾਂਦੀ ਆ ਉਹ ਰੰਗ ਹੋਰਾ ਜਾਂਦਾ ਉਹ ਮਸਤਾਨਾ ਰਾਤ ਗੋਵੇਂ ਤੇ ਸਰਦਾਰ ਨੂੰ ਕਿਤੇ ਆਵਾਜ਼ ਮਿਲੀ ਵੀ ਇਹ ਕੀ ਕਰਦਾ ਰੋਜ਼ ਉਹ ਜਰਾ ਦੂਜਾ ਸਿਨਾ ਦੇ ਜੀ ਇਹਨੂੰ ਕੋਈ ਪੌਣ ਚੜ ਗਈ ਆ ਕੋਈ ਨਵਾ ਗੁਰੂ ਪਾਦਾ ਆਇਆ ਹੈ ਰਾਮਗੜੀ ਕੋਲ ਚੋ ਕਾਰੀਗਰਾਂ ਦੇ ਨੇ ਉੱਥੋਂ ਪਤਾ ਨਹੀਂ ਕੀ ਚੂਰਨ ਖਾਇਆ ਉਧਰ ਦਾ ਖਲੋਂਦਾ ਲਿਆ ਉਹਨੇ ਸੱਜਿਆ ਸਰਦਾਰ ਨੇ ਆਂਦੇ ਕੀ ਜਾਂਦਾ ਰੋਜ ਤੂੰ ਰਾਤ ਬੜਾ ਬੋਲਦਾ ਆਂਦੇ ਨੇ ਮੈਂ ਨਹੀਂ ਬੋਲਦਾ ਸਤਿਗੁਰੂ ਰਾਮ ਸਿੰਘ ਜੀ ਪ੍ਰਗਟ ਹੋ ਗਏ ਨੇ ਸ੍ਰੀ ਭਣੀ ਸਾਹਿਬ ਵਿੱਚ ਆਂਦੇ ਨੇ ਤੈਨੂੰ ਕਿਤਨਾ ਪਤਾ ਆਂਦਾ ਮੈਂ ਉੱਥੋਂ ਹੋ ਕੇ ਇਹ ਕਰਕੇ ਇਥੋਂ ਸ਼ੁਰੂ ਕਰਦਾ ਆਖਿਆ ਕੀ ਹੋਵੇ ਓ ਪੰਆ ਉਸ ਦੀ ਆ ਗੂੰਜਾ ਵਿੱਚ ਸਾਰੇ ਦੇਸ਼ ਦੇ ਉਸ ਦੀ ਆ ਗੂੰਜਾ ਵਿੱਚ ਚ ਗੂੰਜਾ ਪੈ ਗਈਆਂ ਸੂਰਜ ਦਾ ਪ੍ਰਕਾਸ਼ ਆ ਸਰਦਾਰਾ ਕਹਿੰਦਾ ਅੱਛਾ ਆਂਦਾ ਮੈਂ ਉੱਥੇ ਜਾ ਕੇ ਵੇਖਾਂਗਾ ਉਹਦੇ ਵਿੱਚ ਕੀ ਸ਼ਕਤੀ ਆ ਉਹ ਕਾਰੀਗਰ ਏਡਾ ਵੱਡਾ ਕਿੰਨਾ ਗੁਰੂ ਬਣ ਗਿਆ ਦਸਵੇਂ ਪਾਤਸ਼ਾਹ ਤੋਂ ਅੱਗੇ ਗੁਰੂ ਕੋਈ ਨਹੀਂ ਹੈਗਾ ਨਾ ਹੋ ਸਕਦਾ ਆਂਦੀ ਅੱਛਾ ਕਹਿੰਦਾ ਜਿਹੜੀ ਚੀਨੀ ਘੋੜੀ ਦਾ ਲੋਕ ਜਿਗਰ ਕਰਦੇ ਨੇ ਸੰਸਾਰ ਵਿੱਚ ਤਿੰਨ ਜਾਨਵਰ ਤਾਦਾ ਹੋਏ ਨੇ ਇੱਕ ਤੇ ਮਿਰਜੇਵਾ ਤੇ ਜਿਹੜਾ ਨਾ ਮਿਰਜਾ ਹੋਇਆ ਉਹਦੀ ਬੱਕੀ ਹੋਈ ਆ ਉਹਦੇ ਤੋਂ ਬਗੈਰ ਹੋਰ ਕੋਈ ਸਵਾਰ ਨਹੀਂ ਉੱਤੇ ਕਰ ਜਿੱਦਰ ਉਹ ਚੜਾਈ ਕਰ ਗਈ ਭੱਜ ਭੱਜ ਕੇ ਦੌੜ ਕੇ ਖਤਮ ਹੋ ਗਈ ਸੀ ਇਹ ਇੱਕ ਸ਼ਾਹ ਜਰਤਲੀ ਹੋਇਆ ਹੈ ਅਗਰ ਬਾਦਸ਼ਾਹ ਦੇ ਜਰ 170 ਪੀਰ ਮਦਦ ਰਹਿੰਦੇ ਸਨਾਂ ਉਹਦਾ ਦਿਲ ਦਰ ਸੀ ਘੋੜੇ ਨੂੰ ਕਹਿੰਦੇ ਉਹਦੇ ਤੋਂ ਬਗੈਰ ਉੱਤੇ ਕੋਈ ਸਵਾਰ ਨਹੀਂ ਹੋਇਆ ਇਹ ਜਿਹੜੀ ਚੀਨੀ ਘੋੜੀ ਆਏ ਚੀਨ ਵਿੱਚ ਪੈਦਾ ਹੋਈ ਆ ਉਹ ਸੰਤ ਜਿਵੇਂ ਕਥਾ ਕਰਦੇ ਹੁੰਦੇ ਸਨਾਂ ਚੀਨ 'ਚ ਜਦੋਂ ਪੈਦਾ ਹੋ ਜਾਂਦੇ ਕਿਸੇ ਨੂੰ ਸਵਾਰੀ ਦੇ ਉੱਤੇ ਕਰ ਦਿੱਤੇ ਤਿੰਨ ਚੋ ਬਰੇ ਘੋੜੀ ਨਾਨ ਵਾਲੇ ਰਾਜੇ ਨੇ ਖਰੀਦ ਕੇ ਲਿਆਂਦੀ ਆ ਲੋਕਾਂ ਦਾ ਵੀ ਮੰਗਲ ਸਿੰਘ ਵਸ਼ੇਰੀ ਲਿਆ ਗਿਆ ਸੀ ਗਲਤ ਗੱਲ ਉਹ ਕਹਿੰਦੇ ਨੇ ਜਿਸਲੇ ਲੈਣ ਵਾਲੇ ਲਿਆਂਦੀ ਤੇ ਫਿਰ ਉਹਦੇ ਕੋਲ ਰਹੀ ਆ ਬਾਬਾ ਸਮਾ ਕਈ ਸਮੇ ਜੋਰ ਲਾਇਆ ਬੜੇ ਬੜੇ ਸਵਾਰ ਬਾਇ ਨੇ ਘੋੜੀ ਸਵਾਰੀ ਨਹੀਂ ਕਰ ਦਿੱਤੀ ਸਰਦਾਰ ਮੰਗਲ ਸਿੰਘ ਇਹ ਰਿਸ਼ਤੇਦਾਰ ਸੀ ਲੈਣ ਵਾਲੇ ਰਾਜੇ ਦਾ ਇਹ ਜਦੋਂ ਗਿਆ ਤੇ ਤਵੇਲੇ ਚ ਵੜਿਆ ਤਾਂ ਘੋੜੀ ਦੀ ਸ਼ਕਲ ਵੇਖੀ ਘੋੜੀ ਸੋਹਣੀ ਬੜੀ ਸੀ ਇਹਦਾ ਜਰਾ ਸੀ ਨਾ ਮਨ ਜਰਾ ਸੀ ਨਾ ਲਵਾਏ ਹੋ ਗਿਆ ਤਾਂ ਮਨਾ ਘੋੜੀ ਲੈਣ ਵਾਲੀ ਆ ਰਾਜੇ ਨੂੰ ਕਹਿੰਦਾ ਮਰਾਏ ਮੈਨੂੰ ਇੱਕ ਘੋੜੀ ਚਾਹੀਦੀ ਆਂਦੇ ਤੇ ਬੇਲੇ ਬੜੀਆਂ ਬੱਜੀਆਂ ਜਿਹੜੀ ਮਰਜ਼ੀ ਲੈ ਲਓ ਜਦੋਂ ਜਾ ਕੇ ਵੇਖੀ ਤੇ ਆਂਦੇ ਨੇ ਆਹ ਘੋੜੀ ਚਾਹੀਦੀ ਆਂ ਆਂਦੇ ਲੈ ਜਾਓ ਤਾਂ ਸੋ ਘੋੜੀ ਚੰਗੀ ਐ ਤੋ ਅੱਗੇ ਜਾਂਦਾ ਵੀ ਲੈ ਜਾ ਕੋਈ ਇਹ ਛਵਾਰੀ ਨਹੀਂ ਕਰਨ ਦਿੰਦੀ ਜਦੋਂ ਘੋੜੀ ਇਹਨੇ ਸਰਦਾਰ ਮੰਗਲ ਸਿੰਘ ਨੇ ਲੈ ਆਂਦੀ ਇਹਨੇ ਫਿਰ ਸਾਲ ਜੋਰ ਲਾਇਆ ਜਤਨ ਬੜੇ ਬੜੇ ਸਵਾਰ ਪੁੱਠੀ ਪਿੱਛੇ ਨੂੰ ਡਿਗਣ ਜਾਂਦੀ ਸੀ ਸਵਾਰ ਕੰਡ ਤੇ ਬਹਿਣ ਹੀ ਨਹੀਂ ਸੀ ਦਿੰਦੀ ਇਹ ਅੱਕਿਆ ਪਿਆਸ ਹੁਣ ਕੀ ਕਰਾਂ ਜਿਸ ਵਕਤੋ ਅੱਖਿਆ ਪਿਆਸ ਦੇ ਉਹਨੂੰ ਨੌਕਰ ਨੂੰ ਕਹਿੰਦਾ ਹੈ ਤੂੰ ਕੀ ਸ਼ਕਤੀ ਵੇਖੀ ਉਸ ਗੁਰੂ ਦੀ ਆਂਦਾ ਮੈਂ ਜੋ ਤੂੰ ਵੇਖ ਮੈਨੂੰ ਨਾ ਪੁੱਛ ਜਦੋਂ ਤੂੰ ਉੱਥੇ ਗਿਆ ਆਪਣੇ ਆਪ ਹੀ ਮੰਨ ਜਾਏਗਾ ਆਂਦਾ ਫਿਰ ਐਉਂ ਕਰਕੇ ਆਪਣੇ ਨੌਕਰ ਨੂੰ ਕਹਿ ਰਿਹਾ ਹੈ ਕੀ ਕਹਿੰਦਾ ਵੀ ਉਹ ਮੈਂ ਉੱਥੇ ਜਾ ਕੇ ਵੇਖਾਂਗਾ ਉਹ ਦੇਵ ਜੀ ਸ਼ਕਤੀ ਕਾ ਦੀਆ ਜਾ ਕੇ ਵੇਖਾਂਗਾ ਉਹ ਦੇਵ ਗੁਰੂ ਬਣ ਗਿਆ ਦਸਮ ਪਾਤਸ਼ਾਹ ਦੀ ਰੀਸ ਨੀ ਕਰ ਸਕਦਾ ਅੱਛਾ ਚੱਲ ਜਦੋਂ ਦਿਨ ਚੜ੍ਹਾ ਨੌਕਰ ਨੂੰ ਕਿਹਾ ਜਾ ਘੋੜੀ ਦੇ ਉੱਤੇ ਕਾਠੀ ਪਾ ਤੇ ਮੈਂ ਭਣੀ ਤੇ ਇਹ ਮਨ ਵਿੱਚ ਕੀਤਾ ਵੀ ਜੇ ਤੇ ਸਤਿਗੁਰੂ ਆ ਤੇ ਸਭ ਤੋਂ ਪਹਿਲਾਂ ਜਦੋਂ ਪਹੁੰਚਾ ਨਾ ਅੱਗੋਂ ਮੈਨੂੰ ਅਗਲਵਾਂਡੀ ਮਿਲੇ ਜਿਤਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਅਗਲਵਾਂਡੀ ਜਾ ਕੇ ਮਿਲੇ ਸਨ ਤੇ ਘੋੜੀ ਫੜੀ ਸੀ ਉਹਦੀ ਫਿਰ ਕਿਤੇ ਸੁਣਾਵਾਂਗੇ ਕਰਤਾਰਪੁਰ ਤੇ ਦੂਸਰਾ ਮੇਨਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰੇ ਤੇ ਦੂਜੇ ਨੰਬਰ ਇਹ ਆ ਵੀ ਮੈਨੂੰ ਘੋੜੀ ਚੜਾ ਕੇ ਭੈਣੀ ਸਾਹਿਬ ਲੈ ਜਾ ਤੇ ਫਿਰ ਉੱਥੇ ਹੀ ਸ਼ਾਦਾਵਾਂਗਾ ਇਹ ਮਾਨ ਚ ਫੁਰਨਾ ਕਰ ਲਿਆ ਫਿਰ ਉਸ ਗੁਰੂ ਨੂੰ ਮੱਥਾ ਟੇਕ ਕੇ ਆਵਾਂਗਾ ਤੇ ਜਦੋਂ ਘੋੜੀ ਲਿਆਂਦੀ ਨਾ ਤੇ ਫਿਰ ਸਤਿਗੁਰੂ ਕੀ ਹੋਇਆ ਪ੍ਰੇਰਿਆ ਮਾਨ ਘੋੜੀ ਆਣ ਕੇ ਚੁੱਪ ਕਰਕੇ ਖਲੋਗੀ ਜਦੋਂ ਫਰਾਕੀ ਪਾ ਕੇ ਲਿਆਂਦੀ ਨਾ ਤੇ ਤਾਰੂ ਤੁਰੂ ਆ ਢੋਲ ਖਲੋਗੀ ਸਰਦਾਰ ਘੋੜੀ ਤੇ ਸਵਾਰੀ ਕਰ ਲੇ ਤੇ ਘੋੜੀ ਨੇ ਆਖਿਆ ਸ਼ੁਗਰ ਆ ਮੈਨੂੰ ਆਪਣੇ ਮਾਲਕ ਕੋਲ ਤੇ ਲੈ ਕੇ ਚੱਲਿਆ ਨਾ ਜਦੋਂ ਲੈ ਕੇ ਤੁਰ ਪਈ ਘੋੜੀ ਦੇ ਅੱਧਾ ਤੇ ਖਤਮ ਹੋ ਗਿਆ ਨਾ ਉਸੇ ਵੇਲੇ ਅੱਧਾ ਮਰ ਗਿਆ ਵੀ ਬਸ ਇਹ ਕੰਮ ਬਣ ਗਿਆ ਜਾਬ ਜਿਹਦੇ ਘੋੜੀਆਂ ਤੇ ਸਵਾਰ ਹੋ ਕੇ ਸਰਦਾਰ ਲਾਟੋ ਕੋਲ ਆਇਆ ਨਾ ਤੇ ਲਾਟੋ ਕੋਲ ਆ ਤੇ ਇਧਰ ਨੂੰ ਘੋੜੀਆਂ ਮੋੜੀਆਂ ਤੇ ਸੱਦਰੂ ਜੀ ਇਤਿਹਾਮ ਸਰੋਵਰ ਦਵਾਨ ਲੱਗਾ ਸਾਹ ਮੇਰੇ ਮਗਰ ਕੋਈ ਨਾ ਆਵੇ ਮੈਂ ਕੱਲਾ ਚੱਲਿਆ ਅਗਲ ਵਾਰ ਜਦੋਂ ਜੋੜੇ ਪਿੰਪਲ ਸਰ ਵੱਡੇ ਵੱਡੇ ਦਰਖਤਾਂ ਦੇ ਨਾਲ ਥੱਲੇ ਜਾ ਕੇ ਖਲੋਤੇ ਤੇ ਕਮਰ ਕਸਾ ਲਾਇਆ ਜਿਸਰੇ ਘੋੜੀਆਂ ਕੋਲ ਆਈਆਂ ਤੇ ਵੇਖਿਆ ਤੇ ਸਰਦਾਰ ਨੇ ਸਮਝਿਆ ਵੀ ਸਤਿਗੁਰੂ ਤੇ ਨਹੀਂ ਉਹਨਾਂ ਦੇ ਕੋਈ ਸਿੱਖ ਫਿਰਦਾ ਜਿਹੜਾ ਇਹੋ ਜਿਹਾ ਕੱਪੜੇ ਹੋਰ ਤਰ੍ਹਾਂ ਦੇ ਕੀਤੇ ਵੇਖ ਬਦਲਿਆ ਤੇ ਬੋਲਿਆ ਬੜੇ ਪਿਆਰ ਨਾਲ ਆਂਦੇ ਨੇ ਸਿਖਾ ਤੁਹਾਡੇ ਗੁਰੂ ਨੂੰ ਮਿਲਣ ਵਾਸਤੇ ਆਂ ਤੁਹਾਡਾ ਗੁਰੂ ਕਿੱਥੇ ਆ ਕਿਉਂ ਤੈਂ ਭੱਜ ਜਾਂਦਾ ਮੈਂ ਵੀ ਕਾਲੀ ਪ੍ਰਸੰਗ ਲੈ ਜਾਂਦਾ ਇਓਂ ਕਰਕੇ ਕਿਹਾ ਸਭੀ ਉਹ ਕਿੱਥੇ ਗੁਰੂ ਆਖਾਲਸਾ ਦਾਦਾ ਉਸ ਕੋਲ ਅਸੀਂ ਆਹੇ ਆ ਗੁਰੂ ਆਖਾਲਸਾ ਦਾਦਾ ਉਸ ਕੋਲ ਗੁਰੂ ਕਿੱਥੇ ਆ ਉਹਦਾ ਦਰਸ਼ਨ ਕਰਨ ਵਾਸਤੇ ਅਸੀਂ ਆਏ ਆ ਤੇ ਸਤਿਗੁਰੂ ਆਪ ਸਿੰਘ ਆਂਦੇ ਨੇ ਬੜੇ ਪਿਆਰ ਨਾਲ ਆਹ ਸਰਦਾਰ ਜੀ ਕਰਵਾ ਦਿੰਦੇ ਆ ਨਾ ਵੀ ਸਤਿਗੁਰੂ ਆਪ ਸਭ ਗੱਜ ਕੇ ਕਹਤਾਂ ਸਤਿਗੁਰੂ ਆਪ ਸਿੰਘ ਦੀ ਪਰ ਜਿਸ ਵਕਤ ਅੱਗੇ ਲਾ ਕੇ ਤੁਰਪੇ ਮਗਰ ਕੋੜੀਆਂ ਲੈ ਕੇ ਸਰਦਾਰ ਤੁਰਪੇ ਗੁਰੂ ਜੀ ਪੈਦ ਲੱਗੇ ਤੁਰੇ ਆਉਂਦੇ ਆ ਅੱਗੇ ਜਿਹੜਾ ਸਿੱਖਾਂ ਨੂੰ ਪਤਾ ਇਹੋ ਜੇ ਕੌਤ ਕਰਦੇ ਰਹਿੰਦੇ ਨੇ ਸ਼ਾਰਾ ਕੀਤਾ ਇਹਨਾਂ ਨੂੰ ਤਵੇਲੇ 'ਚ ਲਾ ਜੋ ਘੋੜੀਆਂ ਬੰਨ੍ਹ ਕੇ ਸੇਵਾ ਕਰੋ ਘੋੜੀਆਂ ਨੂੰ ਨੀਰਾ ਪੱਠਾ ਪਾਓ ਤੇ ਰਾਤ ਸੁਖ ਲੈਣ ਕੱਲ੍ਹ ਇਹਨਾਂ ਨੂੰ ਗੱਲ ਕਰਾਂਗੇ ਸਤਗੁਰੂ ਨੇ ਅਸੀਂ ਮਾਇਆ ਪਾਈ ਆਣ ਕੇ ਪ੍ਰਸ਼ਾਦਾ ਪਾਣੀ ਛਕਿਆ ਘੋੜੀਆਂ ਨੂੰ ਪੱਠੇ ਪਾਇ ਥੱਕੇ ਸੌਂ ਗਏ ਰਾਤ ਕਿਰਥਾ ਕਾਲੇ ਜੇ ਸੌਂ ਗਏ ਨਾ ਤੇ ਸਤਗੁਰੂ ਨੇ ਫਿਰ ਸੁਖਣੇ ਤੁਹਾਨੂੰ ਨਾ ਰਾਜ ਜਲਕਦੀ ਨਰਪਦੇਖ ਸੰਘਸਰ ਸੋਇਆ ਸੁਖਣੇ ਭਇਆ ਪਖਾਰੀ ਫਿਰ ਸੁਖਣਾ ਵਿਖਾਇਆ ਸਤਗੁਰੂ ਆਪ ਸਿੰਘ ਨੇ ਇੱਕ ਤਖਤ ਬੜਾ ਵਧੀਆ ਹੈ ਬਾਗ ਬੜਾ ਸੁੰਦਰਿਆ ਉੱਤੇ ਆ ਬੈਠੇ ਨੇ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਆਣ ਕੇ ਚਰਨ ਪਰਸਕੇ ਤੇ ਸਰੀਰ ਚ ਰਵ ਗਏ। ਵਾ ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ, ਫਿਰ ਗੁਰੂ ਅਰਜਨ ਦੇਵ ਜੀ ਸਾਰੇ ਵਾਰੀ ਵਾਰੀ ਜਦੋਂ ਦਸੇ ਗੁਰੂਆਂ ਦਾ ਸਰੀਰ ਤੇ ਮੰਗਲ ਸਿੰਘ ਵੇਦਾ ਸਾਰਾ ਚਾਂਸ ਵੇਖ ਰਿਆ। ਮੁਮਨ ਸਾਹਿਬ ਜੀ ਨੱਕ ਨਾਲ ਲਕੀਰਾਂ ਕੱਢ ਕੇ ਸੱਚੇ ਪਾਤਸ਼ਾਹ ਰਣ ਕੇ ਮੱਥਾ ਟੇਕ ਕੇ ਮੁਸਲਮਾਨ ਮੁਹੰਮਦ ਸਾਹਿਬ ਨੇ। ਮੰਗਲ ਸਾਹਿਬ ਜਿਹੜਾ ਸੀ ਨਾ ਖਤਮ ਹੋ ਗਿਆ। ਆਂਦਾਏ ਮਨਾਓ ਜਿਹੜਾ ਘੋੜੀ ਦੇ ਅੱਗੇ ਅੱਗੇ ਤੁਰ ਗਿਆ। ਇਹ ਤੇ ਵੇ ਤੇ ਵੇਖ ਕੇ ਜਦੋਂ ਜਾਗਾਈ ਅੱਖਾਂ ਪੁੱਟੀਆਂ ਦਿਨ ਚੜਿਆ ਤਾਂ ਦਾ ਮਖੜਾ ਦਾ ਮੈਂ ਸੁਖਣੇ ਚ ਕੀ ਵੇਖਿਆ ਤੇ ਉਹ ਕਰਕੇ ਭਾਈ ਜੀ ਲਿਖ ਰਹੇ ਨੇ ਉਹ ਮੰਗਲ ਸਿੰਘ ਸੁਗਣੇ ਵਿੱਚ ਵੇਖੇ ਗੁਰਾਂ ਦੀ ਖੇਡ ਲਿਆਰੀਆ ਕਿੰਨ ਟ ਮੇਰੇ ਟਾਈਮ ਦੀ ਮਨਿਆਦ ਰਹਿ ਗਈ ਆ ਨਾ ਮਨੁੱਖ ਦੀ ਵੀ ਟਾਈਮ ਲਿਆ ਦੇ ਇਸੇ ਤਰ੍ਹਾਂ ਜਿਤਨਾ ਸੈਕਟਰੀ ਸਾਹਿਬ ਮਗਰ ਬੈਠੇ ਨਾ ਇਸੇ ਤਰ੍ਹਾਂ ਪਰਮੇਸ਼ਰ ਨੇ ਮਗਰ ਨੱਕ ਨਸ ਖਸਮ ਮਨੁੱਖ ਦੀ ਫੜੀ ਆ ਮਸਕੀਨ ਦੀ ਟਾਵੇ ਗਏ ਸਨ ਕਥਾ ਕਰਕੇ ਆਏ ਸਨ ਬੜੇ ਮੱਲੇ ਪਰ ਮੇਰੇ ਸੱਜਣ ਸਾਈ ਇਕੱਠੇ ਰਹਿ ਇੱਕ ਮਹੀਨਾ ਕਥਾ ਕਰਕੇ ਜਿਵੇਂ ਆਏ ਨੇ ਪਣ ਤੇ ਬੈਠੇ ਨੇ ਦੁੱਧ ਪੀਤਾ ਦੇ ਘਰ ਵਾਲੇ ਲਿਆਉਂਦੇ ਨੇ ਹੁਕਮ ਆ ਗਿਆ ਚਲੋ ਜਾਣਾ ਬਹੁਤ ਲੋਕਾਂ ਦਾ ਸਵਾਗਤ ਕੀਤਾ ਹੈ ਪਰ ਚਲਾ ਗਿਆ ਮੌਤ ਮਰ ਦੀ ਇੱਕ ਸਾਧੂਆਂ ਵਾਲੀ ਹੋਈ ਉਹਦੀ ਸੋ ਸਜਣੋ ਟਾਈਮ ਥੋੜਾ ਰਹਿ ਗਿਆ ਸੋ ਮੰਗਲ ਸਿੰਘ ਆ ਗਿਆ ਦਿਨ ਚੜ੍ਹਿਆ ਆਖਿਆ ਜੀ ਦਰਸ਼ਨ ਕਰੋ ਸੱਤੇ ਪਾਤਸ਼ਾਹ ਦਾ ਲੋਹੜੇ ਵਾਲੇ ਦਾ ਦਰਵਾਨ ਚ ਹੋਏਗਾ ਮੁਕਤੀ ਗੱਤ ਕਰਾਂ ਜਿਸ ਲੋਹੜੇ ਵਾਲੇ ਦਾ ਦਰਵਾਨ ਹੋਇਆ ਨਾਲ ਸਿੱਖਾਂ ਨੂੰ ਲੈ ਕੇ ਆਇਆ ਜਿਸ ਆਦੇ ਸਤਗੁਰੂ ਆਪ ਸਿੰਘ ਦੇ ਸਾਹਮਣੇ ਆਸਣ ਤੇ ਬੈਠੇ ਸਨ ਜਿਹਦਾ ਲੋਹੜੇ ਵਾਲੇ ਦਰਸ਼ਨ ਹੋਇਆ ਸੀ ਉਹਦਣ ਵੇਖ ਕੇ ਫਿਰ ਚਰਨਾਂ ਤੇ ਨਿਚ ਪਿਆ ਆੰਦੇ ਨੇ ਹੋਏ ਨੇ ਜਦੋਂ ਆੰਦੇ ਨੇ ਲੋਕਾਂ ਦਾ ਮਛੇਤੀ ਕਰਨਾ ਨਾ ਆਦੇ ਜਾ ਘੋੜੀ ਫੜ ਕੇ ਲਿਆ ਚਿੰਨੀ ਜਦੋਂ ਘੋੜੀ ਲਿਆਂਦੀ ਤੇ ਘੋੜੀ ਨੂੰ ਛੱਡਦੇ ਸੱਤੇ ਪਾਸੇ ਛੱਡਦੇ ਉਹਨੂੰ ਐਵੇਂ ਨੀ ਛੱਡੀ ਤੇ ਘੋੜੀ ਨੇ ਮੱਥਾ ਟੇਕਿਆ ਆੰਦੇ ਮੰਗਲ ਸਾਹਿਬ ਤੇ ਬਹਿਣ ਨਹੀਂ ਦਿੰਦੀ ਐ ਲਗਾਮ ਉੱਤੇ ਰੱਖ ਦੇ ਭੂਗ ਪਿਆ ਉੱਠ ਕੇ ਤੁਰੇ ਨੇ ਘੋੜੀ ਸੇਜ ਨਾਲ ਲੈ ਕੇ ਸਤਗੁਰੂ ਰਾਮ ਸਿੰਘ ਸੱਤੇ ਪਾਸੇ ਨੂੰ ਤੇਰੀ ਜਿੰਨੇ ਜਰੀ ਸੰਗ ਤੁਰਦੀ ਆਉਣੀ ਘੋੜੀ ਤੁਰਦੀ ਆ ਤੇ ਮੰਗਲ ਸਿੰਘ ਵਿਰਾਗੀ ਹੋਇਆ ਤੇ ਉਹ ਤੁਰਨ ਲੱਗਿਆ ਫਿਰ ਆਹ ਪੰਕਤੀ ਲਈਆ ਟਾਈਮ ਬਦੋ ਬਦੂ ਭੱਜਾ ਜਾਂਦਾ ਏਉਂ ਕਰਕੇ ਮੰਗਲ ਸਿੰਘ ਨੇ ਉਹ ਦਿਨ ਆਖਿਆ ਕੀ ਕਿਹਾ ਬਈ ਉਹ ਮੈਂ ਅੱਜ ਦੁਨੀਆ ਵਿੱਚ ਆਇਆ ਮੈਨੂੰ ਚੀਨੀ ਵਾਲਾ ਮਿਲ ਨੇ ਸਤੇ ਪਾਸ਼ਾ THAILAND ਗਏ ਸਨ ਤੇ ਨਾਲ ਮੈਨੂੰ ਲੈ ਕੇ ਬਖਸ਼ੀ ਕੀਤੀ ਉਹਨੇ ਆਂਦੇ ਨੂੰ ਸਾਹਮਣੇ ਘੜੀ ਵੇਖ ਲਾ ਇੱਕ ਮਿੰਟ ਨਾਲ ਉੱਪਰ ਹੋਈ ਬਾ ਸਤੇ ਪਾਸ਼ਾ ਤੇ ਹੁਕਮ ਅਨਸਾਰ ਇੱਕ ਦੋ ਮਿੰਟ ਪਹਿਲਾਂ ਸਮਾਪਤੀ ਕਰਦਾ ਸਾਂ ਤੇ ਕਿਉਂਕਿ ਗੁਰੂ ਦਾ ਤੇ ਉਹਨਾਂ ਦੇ ਪ੍ਰਬੰਧ ਕਹਿੰਦਾ ਹੁਕਮ ਹੁੰਦਾ ਸੋਸਾਇਟੀ ਸਾਫ ਸਾਡੇ ਦਰਸ਼ਨ ਸਿੰਘ ਗੁਰਮ ਪਿਆਰੇ ਹੁਕਮ ਕਰ ਰਹੇ ਨੇ ਤੇ ਹੁਣ ਟਾਈਮ ਜਿਹੜਾ ਸਮਾਪਤ ਆ ਤੇ ਪਿੱਛੇ ਨੌਜਵਾਨ ਸਾਡੇ ਸੰਤਗਵਾਰ ਸਿੰਘ ਜੀ ਕਿਉਂਕਿ ਸਾਡੇ ਪੰਡਿਤ ਜੀ ਦੇ ਚੇਲੇ ਆਪਣਾ ਇੱਕ ਵਾਰ ਸਹੀ ਦੋ ਤਿੰਨ ਮੁੰਡੇ ਗੱਭਰੂ ਨੇ ਮੈਂ ਤੇ ਮੈਂ ਅੰਜਨ ਸਿੰਘ ਨਾਲ ਲਾਉਂਦਾ ਨਹੀਂ ਤੇ ਬੁੱਢੇ ਹੋਏ ਪੈ ਹਣ ਪਰ ਉਹ ਘੜੀ ਕੇ ਨਾ ਪ੍ਰਬੰਧਕਾਂ ਦੀ ਕਿਰਪਾ ਨਾਲ ਗੁਜ਼ਾਰਾ ਕਰ ਲੇਦਾ ਤੁਹਾਡੀ ਸੇਵਾ ਕੀਤੀ ਥੋੜਾ ਚਿਰ ਨੌਜਵਾਨਾਂ ਨਾਲ ਤੇ ਨਾ ਰੀਸ ਹੁੰਦੀ ਸਾਡੀ ਬੁੱਢਿਆਂ ਦੀ ਕਦੀ ਕਦੀ ਸਤਾਸ਼ ਗਿਰ ਦਵੇਂ ਖਲੋਂਦੇ ਦੇ ਸਾਲ ਨੂੰ ਪਤਾ ਜਾਂ ਉਹ ਚਲੇ ਗਏ ਉਹਨਾਂ ਦੇ ਛੋੜੇ ਨਾ ਹੋ ਗਏ ਅੰਜਨ ਸਿੰਘ ਦਾ ਨਾਮ ਲੈ ਕੇ ਇਹ ਆ ਸਾਡਾ ਅਸਲੀ ਰੰਗ ਹੈ ਇਹ ਨਾਮਤਾਰੀਆਂ ਅਸਲੀ ਰੰਗ ਹੈ ਵਿਯੋਗ ਸਾਡੇ ਜਿਹੜਾ ਉਹ ਹੱਡੀ ਹੱਡੀ ਤੇ ਲੂੰ ਲੂੰ ਵਿੱਚ ਰਚਿਆ ਹੋਇਆ ਵਿਯੋਗ ਦਾ ਨਾਲ ਉਹਨਾਂ ਕੀਰਤਨ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਅਖੀਰ ਜਦੋਂ ਸਾਨੂੰ ਟਾਈਮ ਸਬਾਬਤ ਹੋਇਆ ਉਦੋਂ ਵੀ ਬੜੇ ਰੰਗ ਵਿੱਚ ਗੱਲ ਆਖ ਤੇ ਐਨ ਸਹੀ ਟਾਈਮ ਤੇ ਉਹਨਾਂ ਆਪਣਾ ਸੰਕੋਚ ਕੇ ਤੇ ਕੀਰਤਨ ਬੰਦ ਕਰ ਦਿੱਤਾ